बस दबाया जिन्ना जन मन टिकदा ही नहीं धर्म दी पढ़ाई की है धर्म दा चलो कर्म की धर्म रा कर्म है ज्ञान प्राप्त करना ਇਹ ਗਿਆਨ ਨਹੀਂ ਉਥੇ ਧਰਮ ਹੈ। ਇਹ ਸਮਝ ਨਹੀਂ ਹੈ ਕਿ ਧਰਮ ਜੀ ਬਿਹਤਰ ਹੋਤੀ ਹੈ। ਇਹ ਧਰਮ ਦੇ ਤੋਂ ਹੋ ਜਾਊਂ ਕੋਈ ਪੜਾ ਦਿਓ। ਧਰਮ ਦਾ ਹੋਈ ਹੋਈ ਵੀ ਦਿੱਤੀ ਜਾਂਦੀ ਹੈ। ਹਾਂ। ਇਹ ਕਿਹਨਾਂ ਤਹਿਦਾਰ। ਕਿ ਕਾਨ ਨਹੀਂ ਹੈਗਾ। ਧਰਮ ਦਾ ਕਰਮਾ ਗਿਆਨ ਦੀ ਪ੍ਰਾਪਤੀ। ਗਿਆਨ ਕੀ ਹੈ? ਆਤਮ ਗਿਆ ਕਿਉਂ ਆਤਮ ਗਿਆ ਪਹਿਲਾਂ ਇਹਨੂੰ ਪਤਾ ਤਾਂ ਹੋਵੇ ਵੀ ਮੁਕਤ ਹੋਣਾ ਕਿਨੇ ਹੈ ਕਿਦੇ ਵਾਸਤੇ ਮੈਂ ਕੁਝ ਕਰਨਾ ਪ੍ਰਾਣੀ ਤੂੰ ਆਇਓ ਲਾ ਲੈਣ ਫਿਰ ਪ੍ਰਾਣੀ ਕੌਣ ਲੈਦਾ ਨਹੀਂ ਪਤਾ ਇਹਨੂੰ ਲਾ ਲੈਣ ਕੌਣ ਆਇਆ ਇਹਦਾ ਨਹੀਂ ਪਤਾ ਇਹਨੂੰ ਲਾਹਾ ਕੀ ਲੈਣਾ ਇਹਦਾ ਹੀ ਨਹੀਂ ਪਤਾ ਇਹਨੂੰ ਇਹ ਪ੍ਰਾਣੀ ਨੂੰ ਅਸਲ ਦੇ ਵਿੱਚ ਤਾਂ ਜੀਵਾਤਵ ਪ੍ਰਾਣੀ ਹੈ ਹੈ ਜੀਵਾਤ ਜੀਵਾਤ ਮਨ ਅੰਦਰ ਵਿੱਚ ਲਿਖਿਆ ਪਈ ਜਾਂਦਾ ਨਾ ਇੱਕ ਆਪਾਂ ਜਿਹੜਾ ਦੋਏ ਦੋਏ ਆਇਆ ਉਹ ਜੀਵ ਔਰ ਆਤਮਾ ਦੋਏ ਕਤ ਜੀਵ ਜੀਵ ਆਤਮ ਮਨ ਚਿਤ ਇਕੱਠੇ ਹੀ ਨੇ ਕੋਈ ਅਸਲ ਦੋ ਹੈ ਨਹੀਂ ਕਹਿਣ ਸੌ ਰੁਪਏ ਦੀ ਆਇਆ ਤਾਂ ਉਹੀ ਆ ਲੈਣ ਕਿਤਾ ਉਹਦੀ ਕੋਈ ਸ਼ਕਤੀ ਹੈ ਜਿਹੜੀ ਸ਼ਰੀਰ ਨੂੰ ਕੰਟਰੋਲ ਕਰਦੀ ਹੈ ਕਿਉਂਕਿ ਮਾਇਆ ਦੇ ਵਿੱਚੋਂ ਜਿਹੜਾ ਗਿਆਨ ਅੰਦਰ ਜਾਣ ਭਰਨ ਦੇ ਵਿੱਚ ਜਾਵੇ ਕਿ ਜਾਵੇ ਕਿ ਬਾਰੋਂ ਚਾਨਣਾ ਵਿਚਾਲੇ ਤੇਰਾ ਰੋਸ਼ਨੀ ਜਾਵੇ ਤੇ ਵਿਚਾਲੇ ਤਾਂ ਅਣਦਾਰੇ ਭਰ ਬਏ ਵਿਚਾਲੇ ਰੋਸ਼ਨੀ ਉਸ ਰੋਸ਼ਨੀ ਚ ਰੋਸ਼ਨੀ ਜਾਵੇ ਕਿ ਕੱਲ੍ਹ ਨਹੀਂ ਜਾਂਦੀ ਹਲੋ ਵੀ ਕੱਲ੍ਹ ਕੋਈ ਵੀ ਚੀਜ਼ ਬਾਹਰੋਂ ਘਰੀਏ ਪਾਣੀ ਪਿਆ ਜਵੇ ਕਾਲਬਾਰ ਹੋ ਜਾਂਦਾ। ਹੂੰ। ਕੋਈ ਕੀ ਨਹੀਂ ਕਰਦੀ ਪੈ ਜਾਂਦੀ। ਕਾਲਬਾਰ ਹੋ ਜਾਂਦਾ। ਕਾਲੇ ਚ ਨੁਕਸ ਪੈ ਜਾਂਦਾ। ਕਿਉਂਕਿ ਕੰਨ ਸਿਰਫ ਗੱਲ ਸੁਣਣ ਵਾਸਤੇ ਹੀ ਨੇ। ਔੜ ਕੀ ਬਾਣੀ? ਔੜ ਨਹੀਂ। ਬਾਣੀ ਜੇ ਤੂੰ ਬਾਣੀ ਆਡਾ ਪਾਉਣਾ ਂਡਾ। ਹੂੰ। ਪੌੜ ਲਈਏ ਪੌੜ ਕੀ ਬਾਣੀ ਫਿਰ ਕਿਹਾ ਜਿਹੜਾ ਬਾਣੀ ਗੁਰੂ ਹੈ ਉੱਥੇ ਪੌੜ ਕਿੱਥੇ ਪਵਨਾ ਬੋਲਾ ਜਾਂ ਮਨ ਬੋਲਦਾ ਉੱਥੇ ਪੌੜ ਕਿੱਥੇ ਬਾਣੀ ਦੇ ਵਿੱਚ ਇਹਨਾਂ ਕਰਨਾਂ ਦੇ ਸੋਡਾ ਨਹੀਂ ਤਾਂ ਹੀ ਉੱਥੇ ਪੌੜ ਹੈਗੀ ਮਾਰੋ ਬੋਲਿਆ ਹੈ ਚ ਪੈਂਦਾ ਕਹਿਣ ਦਾ ਭਾਵ ਹਵਾਤਾ ਕਰਨ ਦੇ ਬਾਹਰ ਟਕਰਾਉਦੀ ਹੋ ਐ ਬਾਹਰੇ ਦੇਖ ਕੇ ਅੰਦਰ ਅੰਦਰ ਜਾਂਦਾ ਬਸ ਉਹਦੀ ਗਰਜਨ ਅੰਦਰ ਜਾਂਦੀ ਹੈ ਗਰਜਨ ਹਵਾ ਕੀ ਆਇਆ ਆਪਣੇ ਕੋਲ ਗਰਜਨ ਗਰਜਨ ਆਈ ਹੈ ਗਰਜਨ ਹਵਾ ਤਾਂ ਨਹੀਂ ਆਈ ਗਰਜਨ ਗਰਜਨ ਆਕਾਸ਼ ਦੇ ਰਸਤੇ ਜਾਂਦੀ ਗਰਜਦਾਰ ਸਵੰਦ ਦਾ ਕਾਹ ਚ ਲੋਭ ਹੈ ਇੱਥੇ ਆਸੀ ਹਵਾ ਨਾਲ ਨਹੀਂ ਆਈ ਗਰਜਦਾਰ ਹਵਾ ਤਾਂ ਪੂਜਾ ਛੱਡ ਦੇ ਇੱਥੇ ਹਵਾ ਛੱਡੀ ਨਹੀਂ ਜੰਦ ਮੈਂ ਹਾਂ ਨੋਕਿੰਗ ਦਾ ਰਸਤਾ ਆਇ ਕਾਸੀ ਇੱਥੇ ਤੋਂ ਰੁਪ ਜਾ ਤੋਂ ਬਾਣੀ ਕੀ ਤੋਦ ਲਾਗ ਤੋਲ ਬਾਣੀ ਲਾਗ ਕੀ ਤੋਦ ਬਾਣੀ ਉਹ ਹੈ ਨਾ ਆ ਸ਼ਬਦ ਨਹੀਂ ਹੈਗਾ ਨਾਮ ਜਿਹੜਾ ਪੂਰਾ ਬੋਲਦੇ ਨੇ ਇਹ ਭਿੱਜੇ ਦੇ ਵਿੱਚ ਤਾਂ ਸਮਾਇਆ ਹੋ ਸਕਦਾ ਗੁਰਬਾਣੀ ਹਰ ਨਾਮ ਸਮਾਇਆ ਤਾਂ ਹੀ ਨੂੰ ਦੁੱਧ ਬੱਲਿਆ ਹੈ ਇਹਨੂੰ ਲਾਭ ਜੀ ਲੱਗਿਆ ਤੋ ਤੋਦੇ ਗਰਬਾੜੀ ਇਹ ਡੜਕਣਾ ਪੈਂਦਾ ਇਹਦੇ ਚ ਰੱਸੀ ਵੀ ਨਿਕਲਦੀ ਗਿਆ ਸਵਿਲਾ ਪੈਂਦਾ ਡੜਕਣੋ ਪੈਂਦਾ ਸਵਿਲਾ ਪੈਂਦਾ ਫਿਰ ਵੀ ਬੋਲੀ ਹੋਈ ਜਿਹੜੀ ਗੱਲ ਹੈ ਹਵਾਲੀ ਕਨਾਂ ਦੇ ਵਿੱਚ ਪ੍ਰਵੇਸ਼ ਕਰਦੀ ਪ੍ਰਵੇਸ਼ ਕੇਵਲ ਤੋਰ ਕਰਦੀ ਕਾਸ਼ੀ ਤੇ ਤੋ ਰੁਪਜਾ ਤੁਰ ਕਾਸ਼ੀ ਜਾਏ ਇੱਕ ਹਿਰਦੇ ਤੋਂ ਤੁਰ ਪੈਦਾ ਹੋਈ ਤੁਰ ਕਿੱਥੋਂ ਪੈਦਾ ਹੋਈ ਹੈ ਹਿਰਦੇ ਤੋਂ ਆ ਜਿਹੜਾ ਮੂਹ ਦੇ ਵਿੱਚੋਂ ਪੈਦਾ ਕਰੀਏ ਤੁਨ ਇਹ ਪੌੜੀ ਕੀ ਬਣੇ ਇਹ ਪੌੜੀ ਮੂਹ ਰਹੀ ਬੋਲਿਆ ਹੈ ਬੋਲ ਪੌੜ ਉੱਥੇ ਤੱਕ ਪਹੁੰਚਾਉਣ ਦਾ ਬੋਲ ਨੂੰ ਬੋਲੇ ਹੈ ਬੋਲ ਨੂੰ ਆਵਾਜ਼ ਹੈ ਉਹ ਤਾਂ ਇੱਕ ਹਵਾ ਤੋਨ ਨੂੰ ਗਿਆ ਤਾਂ ਹਵਾ ਹਵਾ ਗਦਨ ਹਵਾਈ ਫੈਰ ਕਰਦਾ ਬੋਲਣ ਨੂੰ ਹਾਂ ਹਵਾਈ ਫੈਰ ਹਵਾਈ ਫੈਰ ਕਰਨ ਹਾਂ ਉਹ 아이 ਨੂੰ ਅੱਗੇ ਪਜਾਣ ਚ ਮਦਦ ਕਰਦੀ ਉਹ ਨਹੀਂ ਹਾਂ ਆਵਾਜ਼ ਨੂੰ ਗਰਜਨ ਦੇਲ ਵਿੱਚ ਪੈਦਾ ਕਰਦੀ ਆਕਾਸ਼ ਦੇ ਨਾਲ ਚੱਕ ਚੱਕ ਕੇ ਮਿਲਵਾਦੀ ਹੈ ਨਾ ਉਹਨੂੰ ਹਾਂ ਹਾਂ ਉਸ ਅੰਦਰਲੀ ਪਰਾਵਾੜੀ ਨੂੰ ਉਹ ਪੈਦਾ ਕਰਦਾ ਅਕਾਸ਼ ਤੇ ਹਵਾ ਟਕਰਾਉਂਦੀ ਹੈ ਜਿਹੜੀ ਉਹ ਗਰਜਨ ਦੇ ਵਿੱਚ ਗਰਜਨ ਬੋਲੀ ਦੀ ਹਵਾ ਦੋਏ ਰੜਕੇ ਆਵਾਜ਼ ਪੈਦਾ ਕਰਦੀ ਹੈ ਗਰਜਨ ਪੈਦਾ ਕਰਦੀ ਹੈ ਪਵਨਾ ਬੋਲਾ ਗੁਰਗਾ ਗਗਨ ਗਰਜੇ ਗਰਜਨ ਗਗਨ ਤੋਂ ਬਰੋਦੀ ਵੈਰ ਹੁੰਦੀ ਗगन ਵੇਲਾ ਨਹੀਂ ਹੈ ਬਾਣੀ ਜੇ ਰੋਣ ਲੈ ਦੇਣਾ ਪਾਣੀ ਦੀ ਨੋਕ ਆਵਾਜ਼ ਨਹੀਂ ਚਾਰ ਮਹੀਨੇ ਨਮਾ ਨਹੀਂ ਆਵਾਜ਼ ਆਣੀ ਪੈਦਾ ਆਉਂਦੀ ਬਾਣੀ ਜਿਹੜੀ ਆਵਾਜ਼ ਪੈਦਾ ਕੇ ਬੰਦੂਕ ਦੇ ਵਿੱਚ ਜਾਂ ਬਾਹਰ ਨਿਕਲਦੀ ਹੈ ਜਾਨਵਾਜ ਪੈਣਾ ਹੁੰਦੀ ਹੈ ਹਾਂ ਵਾ ਇਹ ਫੈਲਦੀ ਇਸ ਤਰ੍ਹਾਂ ਨਾਲੀ ਜਿੱਦੀ ਪੈਣਾ ਹੁੰਦੀ ਹੈ ਹਾਂ ਨਾਲੀ ਜਿੱਦੀ ਪੈਣਾ ਹੁੰਦੀ ਕਿਉਂਕਿ ਜਿਆਦੇ ਕਦਮੋਂ ਪ੍ਰੈਸ਼ਰ ਦੇ ਨਾਲ ਹੁੰਦੀ ਹੈ ਪ੍ਰੈਸ਼ਰ ਜਿਆਦਾ ਹੁੰਦਾ ਨਾਲੀ ਦੇ ਵਿੱਚ ਬਾਹਰ ਜਾ ਹੋ ਜਾਂਦਾ ਐਸੋ ਯੋ ਯਵਾਂ ਜਦ ਫੱਲਦੀ ਹੈ ਨਾ ਉਦੋਂ ਗਰਜਨ ਪੈਦਾ ਹੁੰਦੀ ਹੈ ਗਰਜਨ ਸਾਡੇ ਕੰਨਾ ਤੱਕ ਜਾਂਦੀ ਹੈ ਫੜ ਬਹਲਾ ਹੈ ਸਰ ਇਹ ਟਕਰੋਦੀ ਗਰਜ ਬੜਾ ਖੜਾ ਕਰ ਦਿੰਦੀ ਜਾਂਦੀ ਜਾਂਦਾ ਤਾਂ ਤਰ੍ਹਾਂ ਗਰਜਨ ਜਿਹੜੀ ਹੈਗੀ ਉਹ ਹਿਰਦੇ ਦੇ ਵਿੱਚ ਮਹਿਸੂਸ ਹੁੰਦੀ ਹੈ ਸਾਪ ਤੇ ਕਾਨੂੰਨੀ ਹੁੰਦੇ ਲੇਕਿਨ ਗਰਜਨ ਜਾਂਦੀ ਆ ਦੇ ਛਾਤੀ ਜਿਹੜਾ ਅੰਦਰ ਤੇ ਸਰੀਰ ਉਹਦਾ ਗਰਜਨ ਸਪਰਸ਼ ਕਰਦੀ ਗਰਜਨ 10 ਵਾਰ ਕਰੂਗੀ ਤੇ ਕੋਲ ਕਿੱਡੀ ਦੂਰ ਕੋਈ ਹਵਾਈ ਜਹਾਜ਼ ਕੋਈ ਸ਼ਹਿਰ ਕਰਦਾ ਧਮਕ ਜਾਂਦਾ ਧਮਕ ਪੈਂਦੀ ਆ ਕਰ ਦੇ ਦਵਾਰ ਉੱਕਾਰੀ ਪੇ ਦਿੱਤਾ ਉਹ ਵੱਲੋਂ ਲਿਬੇ ਬੀਰੋ ਹਾਂ ਜੋੜੀ ਗੱਗਾ गोविंद ਗੁਣ ਰਭੋ ਸਾਥ ਸਾਥ ਜਪਨੀਤ ਗੱਗਾ गोविंद ਗੁਣ ਰਭੋ गोविंद ਦੇ ਗੁਣਾਂ ਉਹ ਤਾੜਨ ਕਰੋ ਪ੍ਰਭੂ ਦਾ ਬੁਰਾ ਤਾੜਨ ਕਰੋ गोविंद ਦੇ ਗੁਣਾਂ ਵਿੱਚ ਲੀਨ ਹੋ ਜਾਓ ਇਹ ਖੁਦ ਸੀ ਆਪਣੇ ਆਪ ਨੂੰ गोविंद ਦੇ ਗੁਣਾਂ ਦੇ ਵਿੱਚ ਲੀਨ ਕਰਦੋ ਗੁੜੀ ਸਵਾੜੇ ਗੁਣ ਕਾ ਗੁੜੀ ਬਹੁ ਵਿਚਰ ਇੱਥੇ ਤੂੰ ਸਾਹਿਬ ਗੁਣੀ ਨਿਧਾਨ ਦਾ ਬੜੇ ਤੋਂ ਬਦਲਦਾ ਗੁਣੀ ਕਿਹ ਲੱਭਦਾ ਬਹੁ ਵਿਚਰ ਗੁਣਾ ਦਾ ਖਜ਼ਾਨਾ ਹੈ ਤੂੰ ਸਾਹਿਬ ਗੁੜੀ ਦਾ ਹਵਲਾ ਗੁਣਾ ਦਾ ਜੇ ਉੱਥੇ ਗੁਣੀ ਨਿਧਾਨਾ ਗੁਣਾ ਦਾ ਖਜ਼ਾਨਾ ਤਾਂ ਇੱਥੇ ਵੀ ਜਿਹੜਾ ਗੁਣੀ ਲੱਭਦਾ ਇਹ ਗੁਰ ਦਾ ਬਹੁ ਵਿਚਰਦੇ ਜੇ ਗੁੜ ਬਣਤਾ ਉਹ ਗੁੜ ਬਣਤਾ ਗੁੜ ਬਣਤਾ ਵੇਲਾ ਸੰਸਾਰ ਨੂੰ ਗੁੜੀ ਨਹੀਂ ਗਿਆ ਦੋ ਲਫਜ਼ ਆਏ ਨੇ ਗੁੜਵੰਤਾ ਜਾਂ ਗੁੜੀਆਂ ਲੋਕ ਕਵੀ ਸੁਣਦੇ ਨੇ ਗੁੜੀਆਂ ਤੇ ਗੁੜੀਆਂ ਕਿਹਾ ਉਹਨੂੰ ਗੁੜੀ ਨਹੀਂ ਕਿਹਾ ਦੇਖੇ ਕੀ ਰੂਪ ਦੇਖੇ ਦੁਨਿਓ ਵਰਸੇ ਰੂਪ ਦੇਖੇ ਬਿੰਦਸ ਜਾਊਗਾ ਰੂਪ ਦੇਖਦੀ ਦੁਨੀਆ ਦੇ ਸਾਹਮਣੇ। ਗੁੜੀ ਲੱਭਾ ਅਰ ਗੁੜੀਆਂ ਲੱਭ ਜਿਹੜਾ ਵਰਤਿਆ ਉਹ ਚੇਤਰ ਵਾਸਤੇ ਵਰਤੇ। ਗੁਣੀ ਜਿਹੜਾ ਵਰਤਿਆ ਗੋੜ ਦਾ ਭਉ ਬਹੁ ਵਿਚਰ। ਗੁੜਾ ਦਾ ਖਿਆ ਤੂੰ ਸਾਹਿਬ ਗੁੜੀ ਦਾ ਵਾਸਤੇ ਵਰਤਿਆ। ਗੁੜਾ ਦਾ ਖਿਆ ਉਹਦੇ ਗੁਣ ਸਾਰੇ ਉਹਦੇ ਚਰਨ ਨੇ ਸਬੰਦਰ ਦਾ ਟੋਟਲ ਪਾਣੀ ਹੈ ਉਹਦਾ ਸਮੁੰਦਰ ਹੈ ਉਹਦਾ ਟੋਟਾ ਸਮੁੰਦਰ ਹੈ ਖਾ ਗਏ ਪਰ ਉਹ ਜੇ ਇੱਕ ਬੂਦ ਲੈ ਲੀਏ ਉਹਦਾ ਚਰਨ ਹਿੱਸਾ ਪਾਰਟ ਹੈ بس ਐਵੇਂ ਇੱਕ ਬੂਦ ਜਿਹੜਾ ਉਹਦਾ ਚਰਨ ਜਿਵੇਂ ਧਨ ਤੇ ਧਨਵੰਤ ਬਦ ਗਿਆ ਧਨਵੰਤਾ ਹੋਇਆ ਤਦ ਉਹ ਤਾਂ ਗੁਲਵੰਤਾ ਦੇ ਵਿੱਚ ਅਰਥ ਲੈ ਲੇ ਕਾਲੀ ਦੇ ਵਿੱਚ ਅਸੀਂ ਅਰਥ ਜਿਆਦਾ ਲੈ ਰਹੇ ਹਾਂ ਇਹ ਫਿਰ ਗੁਰਬਾਣੀ ਚ ਕਿਹੜੀ ਸੈਂਸ ਵਿੱਚ ਵਰਤਿਆ ਹੈ ਲਹੋਜਾ ਜੀ ਇਹ ਲੈ ਕੇ ਚੱਲਾਂਗੇ ਤਾਂ ਇਹ ਸਵਾਲ ਠੀਕ ਹੋਣ ਲਈ ਆਉਂਦੇ ਗੜਬੜ ਹੁੰਦੀ ਰਹੂਗੀ ਤਾਂ ਗੜਬੜ ਹੋ ਜਾਂਦੀ ਗਗਾ ਗੋਬਿੰਦ ਗੋਲ ਰਬ ਉਹ ਸਾਸ ਸਾਸ ਜਪਨੀਤ ਹਰ ਵੇਲੇ ਹਰ ਵੇਲੇ ਦਿੱਤੂ ਦਿੱਤੂ ਹੀ ਨਹੀਂ ਤੜਿਆ ਸਾਸ ਸਾਸ ਜਿਵੇਂ ਜਿਵੇਂ ਸਾਹ ਵਧਣਾ ਇਹ ਸਮਾਂ ਮੇਲੇ ਸਾਹਸ ਗਣ ਕਾਹਦੇ ਵਾਤੇ ਬੜੇ ਬਾਰੇ ਪੱਥਰ ਨੂੰ ਉਹਦੇ ਗੋੜਾ ਦੇ ਵਿੱਚ ਲੀਨ ਕਰ ਲੋਸਤੇ ਵੇਲੇ। ਸੌਕ ਆਪ ਕਰੀ ਜੋ। ਬੰਦਾ ਸੁਭਾਏ ਦਾ ਪੱਥਰ ਰੱਗ ਗੋੜਾ ਜੀ ਲੀਨ ਨਹੀਂ ਹੁੰਦਾ ਉਹ ਗਣ ਨਹੀਂ ਹੈ। ਜੇ ਉਹ ਗਣ त्यागे ਜਾਣਗੇ ਜਿੰਨੇ ਗਣ त्यागे ਜਾਣਗੇ ਉਹਨਾਂ ਲਈ ਨੋਜੂਏ। ਜਿੰਨੀ ਕਿ ਸ਼ਕਤੀ ਛੱਡ ਦੋ ਉਹਨਾਂ ਦੇ ਨਰਮ ਹੋ ਜੂਏ। ਕਹ ਕਹਾਂ ਵਿਸਾਸਾ ਕਾ ਬੇਦਮਨਾ ਕਰੇ ਕਾ ਕਹਾਂ ਨਹੀਂ ਹੈ ਨਬ ਕਹਾਂ ਕਹਾਂ ਕੀ ਵਿਸਾਸਾ ਕਹਾਂ ਦਾ ਅਰਥ ਆ ਜੂਗਾ ਕਿੱਥੇ ਕਹਾਂ ਦਾ ਉਰਦੂ ਦਾ ਲਾਗਦਾ ਕਹਾਂ ਭਾਸ਼ਾ ਦਾ ਲਾਗਦਾ ਕਹਾ ਕਰੋ ਕੀ ਕਰਦੇ ਹੋ ਕੀ ਵਿਸਾਸਾ ਪਿਛਾ ਇਹ ਦਾ ਪ੍ਰੋਸੈਸ ਦੇਦੋ ਉਹਦੇ ਕਹਾਾਂ ਆਪਾਂ ਕਹਿੰਦੇ ਕਹਿੰਦਾ ਹਾਂ ਉਹ ਕਹੋ ਲੋ ਜਿਹਾ ਆਇਆ ਹਾਂ ਹਾਂ ਪੂਰੀ ਥਾਂ ਤੇ ਕੰਮ ਆਇਆ ਕਹੋ ਹਾਂ ਅਸਲ ਦੇ ਵਿੱਚ ਸਾਡੀ ਬੋਲੀ ਹੈ ਸਾਲ ਦੀ ਬੋਲੀ ਹੈ ਇਹਨੂੰ ਉਸ ਰੂਪ ਦੇ ਵਿੱਚ ਦੇਖਣਾ ਪਊਗਾ ਬੋਲਦੇ ਰਹੀ ਉਪੀ ਦੇ ਵਿੱਚ ਕਹਾ ਕਹੀ ਕਹਾ ਵੀ ਸਾਸਾ ਦੇ ਬੇਲੇ ਮੁਨਾਕਰ ਹੋ ਮੀਤ ਕੀ ਪ੍ਰੋਸੈ ਦੇਖੋ ਕੀ